ਦੱਖਣੇ ਮਹੱਲਾ ਪੰਜਵਾਂ ਕੁਰੀਏ ਕੁਰੀਏ ਵੈਦਿਆ ਤਲਗਾੜਾ ਮਹਰੀਰ ਵੇਖੇ ਛੱਟੜ ਥੀਵੰਦੋ ਜਾਮ ਖਿਸਨਦੋ ਪੇਰ 에ਰੋ ਆ ਕੁਰੀਏ ਕੁਰੀਏ ਵੈਦਿਆ ਉਹ ਕਰਾਹੇ ਜਾਂਦੇ ਜਾਂਦਾ ਵੈਦ ਹੈ ਕੋਈ ਗੁਰੂ ਬਣਿਆ ਹੋਇਆ ਵੈਦ ਬੂਆ ਮਰਦ तो ਬਚਾਉਣ ਦੀ ਦਵਾਈ ਦੱਸਦਾ ਹੈ ਚੰਬਣ ਬੰਦ ਦਾ ਇਲਾਜ ਦੱਸਦਾ ਉਹ ਵੈਦ ਹੈ ਕੋਈ ਕੁਰੀਏ ਕੋਰਾਹੇ ਤੇ ਆਇਆ ਪਰ ਰਸਤੇ ਨਹੀਂ ਪਿਆ ਆ ਪਿਆ ਆ ਕੋਰਾਹੇ ਆ ਚੱਲਦਾ ਕੋਰਾਹੇ ਆ ਵੈਦਿਆ ਥਲਗੜਾ ਤੂੰ ਦੇਖ ਤਾਂ ਸਹੀ ਤੂੰ ਜਿੱਧਰ ਨੂੰ ਜਾ ਰਿਹਾ ਹੈ ਪਹਿਲਾਂ ਤਾਂ ਗਾਲਾ ਨਹੀਂ ਸੀ ਹੁਣ ਤਾਂ ਥੱਲੇ ਗਾਲਾ ਰੇ ਤੇਰੇ ਚਿੱਕੜ ਗਾਲਾ ਹੀ ਗਾਲਾ ਦਲਦਲ ਹੈ ਅੱਗੇ ਅੱਛਾ ਜੀ ਤੇਰੇ ਪੈਰ ਦਲਦਲ ਚ ਹੁਣ ਤਸ ਗਏ ਜੀ ਆਹ ਜਾਂਦੇ ਨੇ ਪੈਰ ਪੈਰ ਅੱਗੇ ਨੂੰ ਜਾ ਰਿਹਾ ਥੱਲੇ ਨੂੰ ਜਾ ਰਿਹਾ ਪੈਰ ਤੇ ਰੱਖ ਰਹੇ ਕੋ ਅੱਛਾ ਜੀ ਹਮ ਦੇਖਾ ਤਾਂ ਡੂਬੀਅਲੇ ਹਾਂ ਜੀ ਆ ਤੂੰ ਦੇਖਦਾ ਨਹੀਂ ਗਾਲਾ ਘਾਰ ਆ ਰਿਹਾ ਹਰੇਕ ਪੈਰ ਤੇਰਾ ਪਹਿਲਾਂ ਨੂੰ ਥੱਲੇ ਜਾ ਰਿਹਾ ਠੀਕ ਹੈ ਜੀ ਖਤਰਨਾਕ ਰਸਤੇ ਤੁਰਿਆ ਜਾ ਰਹੇ ਤੈਨੂੰ ਪਤਾ ਨਹੀਂ ਅੱਗੇ ਕੀ ਹੋਊਗਾ ਗਾਣਾ ਮੇਰੇ ਅੱਗੇ ਜਾਦ ਤੇ ਗਾਣਾ ਵੀ ਐ ਥੱਲੇ ਦਲਦਲ ਵੀ ਐ ਨੂੰਗਾ ਵੀ ਐ ਹਾਂ ਵੇਖੇ ਛੱਟਰ ਥੀਵੰਦੋ ਜਾਮ ਖਿਸਨਦੋ ਪੇਰ ਦੇਖ ਲੈ ਤੇਰੇ ਤੇ ਪਿੱਛੇ ਮੁੜ ਕੇ ਛੱਟੇ ਪਏ ਹੋਏ ਨੇ ਆਲੇ ਨਾਲੇ ਛੱਟੇ ਨਹੀਂ ਪਏ ਹੋਏ ਤੇਰੇ ਤੇ ਛੱਟੇ ਕਾਦੇ ਪਏ ਨੇ ਜਿਹਦੇ ਵੀ ਤੇਰੇ ਪੈਰ ਧਸਦੇ ਨੇ ਫਿਰ ਤੇ ਚੱਕਦੇ ਤੇਰੇ ਤੇ ਹੀ ਪੈਣੇ ਨੇ ਆ ਜਿਹੜੇ ਲੋਕਾਂ ਮਾਇਆ ਦੇ ਛਿੱਟੇ ਮਾਰਦੇ ਨੇ ਤੇਰੇ ਤੇ ਉਗਣ ਦੇ ਛਿੱਟੇ ਉਸੇ ਦੇ ਪਏ ਨੇ ਉਲਟੇ ਰਾਹ ਪਏ ਕਰਕੇ ਲੋਬ ਦੇ ਰਾਹ ਪਏ ਹੋਏ ਕ੍ਰੋਧ ਦੇ ਛਿੱਟੇ ਇਸੇ ਦੇ ਲੋਕ ਮਾਰਦੇ ਨੇ ਲੋਕਾਂ ਨੂੰ ਵੀ ਇਹਨੇ ਛਿੱਟੇ ਤੇਰੇ ਤੇ ਪਏ ਹੋਏ ਲੋਕ ਤੇਰੇ ਵੱਲ ਉਂਗਲੀ ਕਰਦੇ ਨੇ ਜਾਂਮਕ ਸਰਦੋ ਤੇਰੇ ਦੇ ਵਿੱਚ ਲੋਕ ਜਿੱ ਧਸਿਆ ਨੇ ਪੈਰ ਤਾਂ ਛਿੱਟੇ ਪਏ ਨੇ ਤੇਰੇ ਤੇ ਗੋਚ ਤਸਵੇਂ ਗਾਰੇਜ ਫੇਰ ਤੇ ਤਾਂ ਛਿੱਟੇ ਪਏ ਹੋਏ ਨੇ ਤੇਰੇ ਤਾਂ ਪਰ ਖਸਰ ਖਿਸਕਦੇ ਜਾਂਦੇ ਨੇ ਥੱਲੇ ਥੱਲੇ ਤੂੰ ਕਿਵੇਂ ਬਚੇਗਾ ਹਾਲ ਤਾਂ ਛਿੱਟੇ ਪਏ ਹੋਣਾ ਤਾਂ ਲਪੜਾਈ ਦੀ ਵਿੱਚੋਂ ਇਹਦੇਉ ਥੱਲੇ ਹੀ ਜਾਣਾ ਜਿਹਦੇ ਵਿੱਚ ਪੈਰ ਖਿਸਕਦੇ ਜਾਂਦੇ ਨੇ ਥੱਲੇ ਹੀ ਥੱਲੇ ਥੱਲੇ ਜਾ ਰਹੇ ਨੇ ਤੇਰੇ ਪੈਰ ਆਪੇ ਵਰਸੀ ਬਣਾਉਣ ਜੋਗੇ ਰਹਿ ਜਾਣਗੇ ਜੇ ਤੱਕ ਸਮਾ ਜਾਣਾ ਤਾਂ ਉੱਤੇ ਟਾਜੀਆਂ ਰੱਖ ਕੇ ਹਾਂਜੀ ਮਹੱਲਾ 5ਵਾਂ सच जाने कच ਵੈਦਿਓ जान तू ਆਗੂ ਆਗੇ सलवे ਨਾਨਕ ਆਤਸੜੀ ਮੰਜ ਨੈਣੂ ਬੀਆ ਢਲ ਪੱਬਣ ਜੂ ਜੁੰਮੀਓ ਔਰ ਸੱਚ ਜਾਣ ਲਈ ਕੱਟਿਆ ਵੈਦਾ ਗੁਰੂ ਤਾਂ ਤੂੰ ਕੱਚਾ ਔਰ ਮੇਰੀ ਗੱਲ ਸੱਚ ਹੈ ਤੂੰ सच ਸੱਚ ਬੋਲਦਾ ਨਹੀਂ सच ਤੇਨੂੰ ਸੱਚ ਦਾ ਗਿਆਨ ਕੱਟਵੇਂ ਦਿਓ ਉਹ ਕੱਟਿਆ ਵੈਦਾ ਗੁਰੂਆ ਸੱਚੀ ਗੱਲ ਜਾਣ आगू, ਤੂੰ ਆਗੂ ਅੱਗੇ ਥਲਵੇ ਤੂੰ ਅੱਗੇ ਅੱਗੇ ਅੱਗੇ ਜਾਈ ਜਾਣਾ ਲੱਗਿਆ ਹੋਇਆ ਆਗੂ ਬਣਿਆ ਹੋਇਆ ਨਾਲਕ ਆਤਛੜੀ ਬੰਝ ਨਾਇਲੂ ਵਿਆਹ ਚੱਲ ਉਬੜ ਜੋ ਜੁਮਿਓ ਆ ਜਿਹੜੀ ਤੇਰੀ ਆਸਾ ਨਾਲ ਰੱਖੀ ਹੋਈ ਚਿੱਤ ਵਿੱਚ ਆਤਸ਼ੜੀ ਆ ਮਾਇਆ ਦੀ ਭੁੱਖ ਰੱਖੀ ਹੋਈ ਹੈ ਤੇਰੇ ਅੰਦਰ ਆਤਸ਼ ਵੈਸੇ ਮਾਇਆ ਨੂੰ ਕਹਿੰਦੇ ਨੇ ਆਤਸ਼ ਅੱਗ ਦੀ ਭੁੱਖ ਹੈ ਤੇਰੇ ਅੰਦਰ ਇਹਦੇ ਵਿੱਚ ਤੇਰਾ ਧਿਆਨ ਹੈ ਮੰਜਣੂ ਇਹਦੇ 'ਚ ਧਿਆਨ ਹੈ ਤੇਰਾ ਮਾਇਆ ਦੇ ਵਿੱਚ بیا ਹਾਂ ਕੱਲ ਜਿਉਂ ਜੁਬਿਉ ਐਵੇਂ ਟਲ ਜਾਣਾ ਹਰ ਵੇ ਤਾਂ ਹੌਲੀ ਹੌਲੀ ਹੌਲੀ ਹੌਲੀ ਸਰੀਰ ਨੇ ਖਰਜ ਜਾਣਾ ਜਿਵੇਂ ਜੰਮ ਕੇ ਹੌਲੀ ਹੌਲੀ ਬੜਾ ਹੋਇਆ ਸੀ ਜਿਵੇਂ ਜਨਮ ਕੇ ਬੜਾ ਹੋਇਆ ਸੀ ਐ ਹੌਲੀ ਹੌਲੀ ਹੌਲੀ ਹੌਲੀ ਹੁਣ ਤਾਂ ਛੋਟਾ ਹੋ ਕੇ ਚਲਦਾ ਜਾਣਾ ਸਰੀਰ ਨੇ ਪੁਰਾਣਾ ਹੋ ਜਾਂਦਾ ਜੰਮ ਕੇ ਜਵਾਨ ਹੋਇਆ ਸੀ ਉਸ ਤੋਂ ਬਾਅਦ ਹੋਰ ਹੋ ਗਿਆ ਖਰਲਾ ਗਿਆ ਸਰੀਰ ਇਹ ਦੀ ਗੱਲ ਕਿਉਂ ਕਹਿੰਦੇ ਪੱਬਣ ਪੱਤੇ ਹੁੰਦੇ ਆ ਜੀ ਮੈਂ ਕਮਲ ਦਾ ਪੰਣੀ ਜੋ ਪੈਦਾ ਹੋਵੇ ਪਾਣੀ 'ਚ ਸਮਾ ਜਾਂਦਾ ਜੇ ਮੈਂ ਤੂੰ ਪਾਣੀ ਦਾ ਬੁਲਬਲਾ ਪਾਣੀ ਚੋਂ ਪੈਦਾ ਹੋ ਕੇ ਤੇ ਪਾਣੀ ਚ ਹੀ ਸਮਾ ਜਾਣਾ। ਮਿੱਟੀ ਚ ਸਮਾ ਜਾਣਾ ਜਿੱਥੋਂ ਪੈਦਾ ਹੋਇਆ ਉੱਥੇ ਹੀ ਸਮਾ ਜਾਣਾ। ਠੀਕ ਹੈ ਵੀ ਜਿਹੜਾ ਤੇਰਾ ਪੰਜ ਪੂ ਤੱਕ ਸਰੀਰ ਹੈ ਦੁਬਾਰਾ ਇੱਥੇ ਹੀ ਦੁਬਾਰਾ ਸ੍ਰਿਸ਼ਟੀ ਢਲ ਪੱਬਣ ਜਿਉ ਜੁਮਿਉ ਆਦਾਨ ਕਾ ਅਚੜੀ ਮੰਜ ਨੈਣੂ ਜੈਣੂ ਵਿਆ ਟਾਲ ਪੱਬਣ ਜਿਉ ਜੁਮਿਉ ਐ ਹੋੜਲ ਗਿਆ ਜਿਵੇਂ ਜੰਮਿਆ ਸੀ ਉਹ ਜਿੱਥੇ ਜਿਹਦੇ ਵਿੱਚ ਜੰਮਿਆ ਸੀ ਉਸੇ ਵਿੱਚ ਮਰ ਗਿਆ ਜਿਹੜਾ ਕਮਲ ਸੀ ਇਹ ਮਾਇਆ ਦੀ ਦ੍ਰਿਸ਼ਟੀ ਰੱਖਦਾ ਉਹ ਸਰੀਰ ਮਾਇਆ ਦੇ ਵਿੱਚ ਹੀ ਮਿਲ ਜਾਂਦਾ ਹੈ ਬਾਅਦ ਦੇ ਵਿੱਚ ਜਿਵੇਂ ਪਾਣੀ ਚੋਂ ਬੱਬਲ ਪੈਦਾ ਹੋ ਕੇ ਪਾਣੀ 'ਚ ਹੀ ਗਲ ਜਾਂਦਾ ਹੈ ਖਤਮ ਹੋ ਜਾਂਦਾ ਇਹਨਾਂ ਦੇ ਅੰਦਰ ਦ੍ਰਿਸ਼ਟੀ ਜਿਨ੍ਹਾਂ ਦੇ ਅੰਦਰ ਇੱਥਾ ਮਾਇਆ ਦੀ ਰਹਿਣੀ ਅਰੇ ਦੀਆਂ ਸਿੱਧੀਆਂ ਦੀ ਰਹਿੰਦੀ ਹੈ ਸੰਤਾਂ ਦੇ ਮੱਤਾਂ ਵਾਲਿਆਂ ਦੇ ਉਹ ਸਾਰੇ ਮਿੱਟੀ ਦੇ ਰਲ ਜਾਂਦੇ ਨੇ ਖਾਖ ਚ ਰਲ ਜਾਂਦੇ ਉਹ ਬੇਟਾ ਹੋ ਕੇ ਸਾਵੇ ਉਪੂਰੇ ਹੈ ਇਹ ਕਹਿੰਦੇ ਆਂ ਵੀ ਜਿਵੇਂ ਇੱਥੇ ਅੰਗਰੇਜ਼ੀ ਵਾਲੇ ਨੇ ਲਿਖਿਆ ਵੀ ਜਿਵੇਂ ਮੱਖਣ ਉਹਦੇ ਵਿੱਚ ਪਿਘਲ ਕੇ ਜਮਈ ਨਾਸ ਹੋ ਜਾਂਦਾ ਐਵੇਂ ਵੀ ਹੋ ਸਕਦਾ ਨਾਨਕ ਆਤਸੜੀ ਮੰਝ ਨੈਣੂ ਬਿਆ ਆ ਇਹ ਵੀ ਅਰਥ ਬਣ ਸਕਦੇ ਨੇ ਨਾਨਕ ਆਤਸੜੀ ਮੰਝ ਨੈਣੂ ਬਿਆ ਟਲ ਪੱਬਣ ਜੂ ਜੁੰਮਿਓ ਵੀ ਜਿਵੇਂ ਮੱਖਣ ਜਿਹੜਾ ਉਹ ਗਰਮੀ ਦੇ ਵਿੱਚ ਸਮਾਪਤ ਹੋ ਜਾਂਦਾ ਆਪਕਾ ਟੇਰ ਦਾ ਬਕਰ ਦਾ ਬਣ ਜਾਂਦਾ। ਜਲ ਜਾਂਦਾ ਨਾ ਖਤਮੇ ਹੋ ਜਾਂਦੀ ਉਹਦੀ ਹੋਂਦ ਪਾਣ ਜੀਵ ਨੂੰ ਵਾਪਸ ਛਿੜਦੀ ਏ ਬਣ ਕੇ ਛੜ ਜਾਣਾ ਉਹਨੇ ਫਿਰ। ਨਾਮ ਨਿਸ਼ਾਨ ਨਹੀਂ ਮਿਟਜੂ। ਮੈਂ ਵੀ ਹੈ ਚੈਲੰਜ ਆਫ ਸਟੇਟ ਹੁੰਦੀ ਹੋਈ ਇਹਦੀ ਵੀ। ਹਮ ਹਮ। ਪਰ ਕਿਉ ਉਹਦੀ ਇੱਥੇ ਕਿਉਂ ਨਾ ਇਸ ਕਰਕੇ ਕਿਉਂ ਦੀ ਮਿਸਾਲ ਨਹੀਂ ਦਿੰਦੇ। ਅਜਾ ਅਾਤਸੜੀ ਮਾਇਆ ਹੋਊ ਹੈ ਜੀ ਨਾਨਕ ਆਤਸੜੀ ਮੰਝ ਨੈਣ ਬਿਆ ਅਾਤਸੜੀ ਆਟੇ ਸ਼ੁਭ ਦਾ ਅੱਛਾ ਜੀ ਆਟੇ ਕਿ ਅਗ ਨੂੰ ਕਹਿ ਰਹੇ ਨੇ ਠੀਕ ਨੇ ਤੈਨੂੰ ਸਾੜ ਜਿਵੇਂ ਪੱਪੜ ਪਾਣੀ ਦੇ ਬਿਨਾ ਪੱਪੜ ਸੜ ਜਾਂਦਾ ਠੀਕ ਹੈ ਜੀ ਉਹ ਤਾਂ ਕਵੀ ਟੀਮ ਅਰ ਜਾਂਦਾ ਹੂੰ ਹੂੰ ਠੀਕ ਹੈ ਮੈਂ ਦੇਖਦਾ ਸਾਫ ਸਿਣੀ ਕੀ ਕਿਦ ਹੈ ਉਹ ਵੀ ਖੁਸ਼ ਹੋਗੀ ਗੋਰੀ ਵੀ ਖੁਸ਼ ਹੋਗੀ ਲਾ ਜੀ ਸਾਫ ਸਿਨਾ ਦੇਖਾਂ ਕਲਾਕਾਰ ਨੇ ਕੀ ਕੀ ਹੈ ਅੰਸ਼ ਜੇ ਯਕਰ ਹੈਗਾ ਊਰਜਾ ਇਹ ਸਹੀ ਗਿੱਟੇ ਆਤਸੜੀ ਹੈ ਆਜਾ ਆਤ ਸ ਆਤ ਪਤਵੀ ਆਤਸੜੀ ਹੈ ਚਲੇ ਕੋ ਜੀ ਇੱਕ ਵਾਰ ਆਉਣਾ ਹੀ ਨਹੀਂ ਇਹ ਤਾਂ ਬਹੁਰੀ ਵਾਰ ਆਉਂਦਾ ਨਹੀਂ ਹੈ ਜੇ ਸ਼ਬਦ ਤੇ ਇੱਕੇ ਵਾਰ ਤੇ ਉਹ ਕਹਿੰਦਾ ਹੈਗਾ ਆਤਸ਼ਰੀ ਵੈਦਯ ਨਾਸਵੰਦ ਜਾਣੇ ਵਾਲਾ ਗਾ ਅਗਾਹਾਂ ਸਲਵੇ ਤੂੰ 71 ਘਰ ਸਲਵੇ ਨਾਲ ਇਕੱਠਾ ਕਰਨਾ ਹੁੰਦਾ ਜੀ ਹਾਂ ਆਤਸੜੀ ਅੱਗ ਨੈਣੂ ਨੂੰ ਮੱਖਣ ਕਹਿੰਦਾ ਹੈ ਅੱਖਾਂ ਦੇ ਅੰਦਰ ਨਹੀਂ ਨੇ ਨਾਂ ਨਖਾਂਵੀਆਂ ਨੇ ਅੱਛਾ ਆਪਾਂ ਕਰ ਲੈਨੇ ਇਹਨੂੰ ਵੀ ਕਲੀਅਰ ਹੈ ਜੀਵ ਅੱਛਾ ਜੀ ਅ ਸਲੂ ਹੋਇਆ ਨੈਣੂ ਨਸੂ ਨੈਣੂ ਨਸੂ ਸਭ ਨੂੰ ਰਸਪਤ ਦੇ ਦ੍ਰਿਟਾ ਹੋਇਆ ਕੱਢ ਜੋ ਕੱਢ ਮਿੰਟ ਦੇਖ ਲੈਨੇ अच्छा जी कंट्रोल वी वही हां और टाल करके करता है टाल टाल ला हुदा ਤਾਂ ਮੁੱਖ ਕਰਦਾ ਮੁੱਖੜ ਡਲ ਜਾਂਦਾ আচ্ছা ਜੀ ਪੱਪਣ ਮੁੱਖ ਕਰ ਗਿਆ ਹੋ ਫਿਰ ਪੱਪਣ ਨਹੀਂ ਉਹ ਤਾਂ ਠੀਕ ਹੈ ਉਹ ਤਾਂ ਵਾਰ ਆਉਂਦਾ ਹੋਰ ਜਗ੍ਹਾ ਨਹੀਂ ਆ ਰਿਹਾ ਆਇਆ ਇੱਕ ਵਾਰ ਕਿਹੜਾ ਸ਼ਬਦ ਹੈ ਸਰਬ ਨੂੰ ਨੈਣੋਂ ਸਰਬ ਨੂੰ ਨੈਣੋਂ ਨਰਕਟੂ ਸਰਬ ਨੂੰ ਰਸਵਤ ਅਈ ਤੇਰੀ ਚਾਹਾਂ ਨਾ ਬੰਦੇ ਕਵੀਨ ਦਾ ਨੈਣੋਂ ਨਰਕਟੂ ਸਰਬ ਨੂੰ ਹਾਂਜੀ ਰਸਵਤ ਅਰਸਵਤ ਨਾਮ ਨੈ ਨੈ ਇਥੇ ਨੰਨੇ ਨਾਲ ਠੀਕ ਹੈ ਦੇਖ ਲਿਨੇ ਆਪਾਂ ਦੋ ਹੀ ਗੱਜਾ ਗੱਲ ਕਰ ਲੈਣਾ ਇੱਥੇ ਨਾਲ ਹੈ ਇੱਥੇ ਨਾਨਕ ਮੈਂ ਅਰਥ ਪੜ੍ਹਦੇ ਨਾਨਕ ਆਤਛੜੀ ਮੰਝ ਨੈਣੂ ਬਿਆ ਵਿਆਹ ਤਲ ਪੱਬਣ ਜੂ ਜੰਮਿਓ ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਜੀ ਅਰਥ ਇਹ ਜੀਵ ਨਾਸ਼ਵੰਤ ਕੱਚ ਰੂਪ ਮਾਇਆ ਨੂੰ ਤੂੰ ਸਦਾ ਫਿਰ ਜਾਣਦਾ ਹੈ ਤੇ ਹੋਰ ਹੋਰ ਇਕੱਠੀ ਕਰਦਾ ਹੈ ਪਰ ਇਹ ਨਾਨਕ माया ਮਾਇਆ ਇਉ ਹੈ ਜਿਵੇਂ ਅੱਗ ਵਿੱਚ ਮੱਖਣ ਨਾਸ ਹੋ ਜਾਂਦਾ ਹੈ ਪਗਰ ਜਾਂਦਾ ਹੈ ਜਾਂ ਜਿਵੇਂ ਪਾਣੀ ਦੇ ਢਲ ਜਾਣ ਨਾਲ ਚੁਪਤੀ ਡਿੱਕੇ ਨਾਸ ਹੋ ਜਾਂਦੀ ਹੈ ਪਾਣੀ ਢਲ ਜਾਣ ਨਾਲ ਪਾਣੀ ਦੇ ਸੁੱਕ ਜਾਣ ਨਾਲ ਪਾਣੀ ਦੇ ਢਲ ਜਾਣ ਨਾਲ ਜੇ ਐਵੇਂ ਵੈਸੇ ਹਾਂ ਪਾਣੀ ਜਿਹੜਾ ਦੂਸਰਾ ਸ਼ਬਦ ਹੈ ਜਿਹਦੇ ਵਿੱਚ ਕੀ ਨੰਨੇ ਨਾਲ ਆਉਂਦਾ ਹੈ ਨੈਣੂ ਨੈਣੂ ਬੀਆ ਬੀਆ ਆਇਆ ਹੈ ਨਾ ਅੰਨੇ ਲਫਜ਼ ਹਾਂਜੀ ਨੈਣੂ ਬੀਆ ਆਇਆ ਦੋ ਜਗ੍ਹਾ ਹੋ ਹਾਂਜੀ ਵਿਆਹ ਦਾ ਆਇਆ ਵੀ ਦੂਜੇ ਪਾਸੇ ਲੱਗੀਆਂ ਹੋਈਆਂ ਅੱਖਾਂ ਤੇਰੀਆਂ ਆਇਆ ਵੱਲ ਆਤਿਸ਼ਨਾ ਜੁੜੀਆਂ ਹੋਈਆਂ ਨੇ ਅੱਖਾਂ ਆਤਿਸ਼ਨਾ ਅਗਨ ਠੀਕ ਹੈ ਜੀ ਤੇ ਦੂਸਰੀ ਜਗ੍ਹਾ ਹੈਗਾ ਜੀ ਇਹ ਸ਼ਬਦ ਦੋ ਵਾਰ ਹੋਰ ਆਉਂਦਾ ਨੰਨੇ ਨਾਲ ਨੈਣੂ ਨੈਣੂ ਨਕਟੂ ਸ਼ਰਵਣੂ ਰਸਪਤ ਇੰਦਰੀ ਕਹਾ ਨਾ ਮਾਨਨਾ ਇੱਥੇ ਇਹਨਾਂ ਨੇ ਫਿਰ ਨੈਣੂ ਦੇ ਅਰਥ ਅੱਖਾਂ ਹੀ ਕੀਤੇ ਨੇ ਅੱਖਾਂ ਹੀ ਨੇ ਅਰਥ ਅચ્છਾ ਇੱਕ ਜਗ੍ਹਾ ਹੋਰ ਵੀ ਆਉਂਦਾ ਹੈ ਜੀ ਨੀਰ ਬਿਲੋਵ ਹੈ ਸ਼ਰਮ ਭਾਵ ਨੈਣੂ ਕੋਸੈ ਰੀਸਾ ਇਹ ਹੈ ਜੀ ਸਾਰੰਗ ਮਹੱਲਾ ਪੰਜਵਾਂ ਹ ਇੱਥੇ ਨੈਣੂ ਦੇ ਅਰਥ ਇਹਨਾਂ ਨੇ ਕੀਤੇ ਹੈ ਨੈਣੂ ਨੂੰ ਇੱਥੇ ਵੀ ਇਹਨਾਂ ਨੇ ਮੱਖਣ ਹੀ ਕਿਹਾ ਫਿਰ ਨੀਰ ਬਿਲੋਗ ਹੈ ਸ਼ਰਮ ਸ੍ਰਮ ਪਾਵੈ ਨੈਣੂ ਕੋਸੈ ਰੀਸੈ ਨੈਣੂ ਨੂੰ ਪੁੱਛਿਆ ਉਖੜ ਨੂੰ ਵੀ ਨੈਣੂ ਨੈਣੂ ਕਿਵੇਂ ਰੀਸੈ ਐਸੇ ਰੀਤਾ ਹੋਊਗਾ ਹਾਂਜੀ ਬਿਨ ਗੁਰ ਭੇਟੇ ਮੁਕਤੀ ਨਾ ਕਾਹੂ ਮਿਲਤ ਨਹੀਂ ਜਗਦੀਸ਼ੈ ਖੜਨਾ ਵੱਖਣੇ ਆਇਆ ਕਿੱਥਾ ਜਾਦਾ ਆ ਅੱਛਾ ਜੀ ਤੇ ਇੱਥੇ ਕੀ ਬਣੂਗਾ ਨੀਰ ਬਿਲੋਵੈ ਅਤਿ ਸ਼ਰਮ ਭਾਵੈ ਨੈਣੂ ਕੈਸੇ ਰੀਸੈ ਵੀ ਤੇਰੀਆਂ ਜਿਹੜੀਆਂ ਅੱਖਾਂ ਇਹ ਨਹੀਂ ਰ ਅੱਖਾਂ ਦੇ ਰੀਆਂ ਕਿਵੇਂ ਦਰਸ਼ਨ ਅੱਖਾਂ ਨੂੰ ਕਾਲਾ ਦਰਸ਼ਨ ਹੋ ਗਏ ਤੇਰੇ ਠੀਕ ਹੈ ਜਦੋਂ ਤੂੰ ਰੀਸੇ ਇਹ ਵੀ ਜੇ ਤੂੰ ਰੀਸੇ ਲਾਭਾਉਣਾ ਹੈ ਰੀਸੇ ਉਹ ਗੱਲ ਲਾਭ ਦੋ ਰੀਚ ਹੈ ਅੱਖਾਂ ਨੂੰ ਕੀ ਦੇਖਣਾ ਉਤੋਂ ਪਾਣੀ ਚ ਦਰਸ਼ਨ ਕਾਲਾ ਹੁਣ ਜਦੋਂ ਤੱਕ ਤਤ ਗਿਆਨ ਨੂੰ ਨਾ ਬੁਲਾਇਆ ਜਾਵੇ ਹੈ ਜੀ ਨੀਰ ਬੁਲਾਵੇ ਤਾਂ ਨੀਰ ਤਾਂ ਤਤ ਨਹੀਂ ਨਾ ਹੈ ਆ ਦੁੱਧ ਦਾ ਬਲਾਉਂਵੇ ਨਾ ਢੱਡੋ ਘੱਟ ਗੁਰਬਾਣੀ ਦਾ ਬੁਲਾਉਂਦਾ ਠੀਕ ਹੈ ਅਤਿશ્રਮ ਪਾਵੇ ਨੈਣੂ ਕੈਸੇ ਰੀਸੈ ਚਲੋ ਜੇ ਰੀਸੈ ਵੀ ਹੋ ਗਾ ਅਗਲੀ ਅਚਾ ਜੀ ਰੀਸੈ ਲਾਭਦਾ ਹੈ ਅੱਛਾ ਚ ਜਗਦੀਸ਼ੈ ਆਉਂਦਾ ਵੈਸੇ ਬਿਨ ਗੁਰ ਭੇਟੇ ਮੁਕਤ ਨਾ ਕਾਹੂੰ ਮਿਲਤ ਨਹੀਂ ਜਗਦੀਸ਼ੈ ਆਹ ਜਗਦੀਸ਼ੈ ਠੀਕ ਹੈ ਅਤੇ ਵੀਸੇ ਹੈ ਉਹ ਤੇ ਜਗਦੀਸ਼ੇ ਤਾਂ ਆਊਗਾ ਤੇ ਰੀਸੇ ਦਾ ਮਤਲਬ ਨਹੀਂ ਵੀ ਰਜਾ ਹੋ ਜਬ ਵੀ ਕਿਸ ਤਰ੍ਹਾਂ ਹੋ ਜੈਸੇ ਨਿਰ ਕੋਈ ਆਕਾਉਂ ਦਰਸ਼ਨ ਕੀਤਾ ਹੋਵੇ ਮਤਲਬ ਪਾਣੀ ਦੇ ਵਿੱਚੋਂ ਦਰਸ਼ਨ ਕਿਹੜੀ ਚੀਜ਼ ਦਾ ਹੋਵੇ ਪਾਣੀ ਤਾਂ ਲੜਕਦਾ ਦੇਖੇਗੀ ਪਾਣੀ ਉਹ ਦਿਖੂਗਾ ਉਹ ਹੋਰ ਤਾਂ ਕੋ ਤੇ ਖਾਣੀ ਵੱਖਾ ਉਹਦੇ ਚੋਂ ਕੋਈ ਨਿਕਲ ਆਣੀ ਚੀਜ਼ ਤਾਂ ਦਿਖਣੀ ਦੀ ਠੀਕ ਹੈ ਇਹ ਰਿਜੇ ਕਰਦਾ ਥੱਲੇ ਕੈਸੇ ਰਿਸੇ ਦੇ ਅਰਥ ਆ ਜਾਣ ਨੇ ਪਰ ਫੈਸੇ ਸਾਹਿਬ ਸਿੰਘ ਕਹਿੰਨੇ ਕੈਸੇ ਰਿਜੇ ਕਿਵੇਂ ਨਿਕਲ ਸਕਦਾ ਹੈ ਪਰ ਇਹ ਨਿਕਲਣਾ ਨਹੀਂ ਹੁੰਦਾ ਇਹਨਾਂ ਨੂੰ ਵੀ ਹੁੰਦਾ ਵਿਸ਼ਵਾਸ ਕਿ ਮੈਂ ਆਵੇ ਅੱਖਾਂ ਨਿਕਲਿਆ ਠੀਕ ਹੈ ਨੈਣ ਦਾ ਭਾਵ ਉਹੀ ਹੈ ਨੈਣ ਬੁੱਧੀ ਹੋ ਗਈ ਹੈ ਨਾ ਜੀ ਹਾਂ ਬੁੱਧੀ ਠੀਕ ਹੈ ਇਹਨਾਂ ਨੇ ਫਿਰ ਮਾਇਆ ਅਰਥ ਕੀਤੇ ਆ ਇਹਨਾਂ ਨੂੰ ਮੱਖਣ ਲੱਗਦਾ ਵੀ ਮੱਖਣ ਕਿਵੇਂ ਨਿਕਲ ਸਕਦਾ ਅੱਖਾਂ ਦਾ ਮੱਖਣ ਆਇਆ ਹੋਇਆ ਅੱਛਾ ਜੀ ਮੱਖਣ ਦਾ ਲਬਦ ਮੱਖਣ ਖਾਇਆ ਸੰਸਾਰ ਠੀਕ ਹੈ ਜਰ ਕਿ ਪਹਿਲੇ ਐਸੇ ਸ਼ਬਦ ਜਦ ਨੈਣੂ ਆਉਂਦਾ ਤਾਂ ਉੱਥੇ ਇਹਨਾਂ ਨੇ ਇਹਦੇ ਅਰਥ ਨੈਣੀ ਕੀਤੇ ਅੱਖਾਂ ਕੀਤੇ ਨੇ ਠੀਕ ਹੈ ਫਿਰ ਰੀਸਾ ਠੀਕ ਹੈ ਕਿ ਉੱਪਰ ਦੀਸਾ ਕੈਸੇ ਰੀਸ ਹੈ ਹਾਂਜੀ ਰੀਸਾ ਨਹੀਂ ਦੀਸ਼ਾ ਮਰਚਾਈਦਾ ਅੱਛਾ ਜੀ ਠੀਕ ਹੈ ਜੀ ਨੈਣ ਨੂੰ ਆ ਠੀਕ ਹੈ ਫਿਰ ਆਪਾਂ ਕਹੀਏ ਨਾਨਕ ਆਤਸੜੀ ਮੰਜ ਨੈਣੂ ਬਿਆ ਤਲ ਪੱਬਣ ਜੂ ਜੁੰਮੋ ਜੁੰਮਿਓ ਹਾਂ ਬਲਕਿ ਉਹਵੇਂ ਡਲ ਸੀ ਠੀਕ ਹੈ ਜੀ ਜਦੋਂ ਮਾਇਆ ਰੂਪੀ ਅੱਗ ਦੇ ਵਿੱਚ ਜੋ ਨੈਣ ਦੇਖਦੇ ਆ ਉਹਦੇ ਨਾਲ ਕੁਛ ਪ੍ਰਾਪਤੀ ਨੀ ਹੋ ਰਹੀ ਹੈ ਜੀ ਉਹਦੇ ਵਿੱਚੇ ਸਮਾਜ ਜਾਂਦੇ ਨੇ ਅੱਗ ਕੇ ਦਾ ਅਰਥ ਕਰਨਾ ਚਾਹੀਦਾ ਇਹਨਾਂ ਨੂੰ ਚਲੋ ਜੀ ਦੂਸਰਾ ਧਿਆਨ ਠੀਕ ਹੈ ਜੀ ਮਹੱਲਾ ਪੰਜਵਾਂ ਪੋਰੇ ਪੋਰੇ ਰੂਹੜੇ शिव दे आलक मुद्दत पई चिराणियां चिराणियां फिर कड्डू आवे रुत् पोरे पोरे थोड़े थोड़े थोड़े थोड़े रुड़दे रुड़दे रुड़दे रुड़दे सारे श्री रुड़ गया पल पल गई पे आखी आ की केड़े बाट के पल पल गई पे ਅੱਖ ਬਿਜਲੀ ਗੋਲ ਲਈ ਜਿੰਦਗੀ ਨਾਂਗੀ ਬਹੁਤ ਪਰ ਛੇਵੰਦੇ ਹਲਕ ਜਿਹੜਾ ਕੰਮ ਕਰਨਾ ਆਇਆ ਤਾਂ ਉਹਦੇ ਵਾਸਤੇ ਆਲਸ ਕਰੀ ਜਾਂਦਾ ਐ ਜੋ ਵੀ ਉਹ ਅਲਸ ਕੀਤੀ ਹੋਈ ਐ ਕਰਨੇ ਵਾਲਾ ਕੰਮ ਨਹੀਂ ਕੀਤਾ ਸ਼ੁਰੂ ਐ ਜੋ ਜਿੰਦਗੀ ਨਾਂਗੀ ਬੁਰਖ ਛੇਵੰਦੇ ਹਲਕ ਪੂਰੇ ਪੂਰੇ ਰੂਹੜੇ ਛੇਵੰਦੇ ਸੇਵਿੰਦੇ ਆਲਸੋ ਹਾਂਜੀ ਸੇਵਿੰਦੇ ਹਲ ਕਰ ਸੇਵਿੰਦੇ ਹਲ ਕਰਦੇ ਨੇ ਓਵਰ ਥੋੜੀ ਥੋੜੀ ਕਰਕੇ ਲੱਗੀ ਜਾਂਦੀ ਐ ਤਾਂ ਲੱਗੀ ਜਾਂਦੀ ਠੀਕ ਹੈ ਜੀ ਪੂਰੇ ਪੂਰੇ ਰੂਹੜੇ ਮੁੱਦਤ ਪਈ ਚਰਾਣੀਆਂ ਫਿਰ ਕੱਡੂ ਆਵੇ ਰੁੱਤ ਆਹ ਕਹਿੰਦੇ ਬਹੁਤ ਚਿਰ ਹੋ ਗਿਆ ਮੁੱਦਤ ਹੋ ਗਈ ਇਹ ਜੂਨ ਦੇ ਵਿੱਚ ਐਡਾ ਕਰਦਾ ਨੇ ਤੂੰ ਚਿਰਾਂ ਤੋਂ ਹੀ ਇਹ ਜਵਾਬ ਆਇਆ ਤੇਰਾ ਫਿਰ ਕਰ ਦੂੰ ਆਗਰ ਰੁੱਤ ਫਿਰ ਦੁਬਾਰਾ ਮੌਸਮ ਕਦੋਂ ਆਊਗਾ ਫਿਰ ਦੁਬਾਰਾ ਮਨੋ ਕਾਜ ਨੂੰ ਕਰੋ ਮਿਲੂਗਾ ਹੁਣ ਤਾਂ ਹਲ ਕਰਦਣ ਹੁਣ ਹਲ ਕਰਦਾਂ ਫਿਰ ਰੁੱਤ ਕਦੋਂ ਆਊਗੀ ਇਹ ਠੀਕ ਹੈ ਜੀ ਦੁਬਾਰਾ ਮਿਲਣ ਦੀ ਰੁੱਤ ਫਿਰ ਕਦੋਂ ਆਊਗੀ ਹਾਂਜੀ ਬਿਲਕੁਲ ਠੀਕ ਹੈ ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੋਂ ਮਾਰੇ ਲੇਖੇ ਠੀਕ ਹੈ ਇਸ ਗੱਲ ਵੱਲ ਨੂੰ ਨਹੀਂ ਆਉਂਦਾ ਅਜੇ ਵੀ ਵਿਛੜਨਾ ਹੀ ਚਾਹੁੰਦਾ ਹਾਂ ਜੀ ਆਇਓ ਆਇਓ ਕਹਨਾ ਬਧੇਰਾ ਅੱਛਾ ਜੀ ਔੜੀ ਤੁਧ ਤੂੰ ਵਰਨਾ ਬਾਹਰਾ ਇਹ ਮਾਨਸ ਜਾਣੈ ਦੂਰ ਤੂੰ ਵਰਤੈ ਜ਼ਾਹਰਾ ਤੁਦਰੂਪ ਨਾ ਰੇਖਿਆ ਜਾਤ ਨਾ ਤੇਰਾ ਰੂਪ ਨਾ ਕੋ ਰੇਖ ਕਿਚ ਸਕਦਾ ਨਾ ਤੇਰੀ ਕੋ ਜਾਤ ਹੈ ਤੂੰ ਵਰਨਾ ਬਾਹਰ ਆ ਜਿਹੜੇ ਚਾਰੇ ਵੰਡ ਬਣਾਏ ਨੇ ਬੰਦਲੇ ਨਾਲ ਤੇ ਪਰੇ ਬਾਹਰ ਤੂੰ ਵਰਨਾ ਬਾਹਰ ਇਹ ਮਾਨਸ ਜਾਣੇ ਦੂਰ ਇਹ ਆਦਮੀ ਸਾਰੇ ਦੂਰ ਜਾਣਦੇ ਨੇ ਪੜਾਦੇ ਨੇ ਬੰਦਲੇ ਨੇ ਪੜ੍ਹਨੇ ਪੜਾਏ ਐਸੇ ਨੇ ਦੂਰ ਜਾਣਦੇ ਨੇ ਤੈਨੂੰ ਦੂਰ ਤੂੰ ਦੇ ਅੰਦਰ ਜਹਰਾ ਵਰਤਦਾ ਏਂ ਸਭੇ ਘਟ ਰਾਮ ਬੋਲਦਾ ਜਦ ਇਹ ਨੇ ਪਰ ਫੇਰ ਵੀ ਦੂਰ ਬੰਦੀ ਜਾਂਦੇ ਫੇਰ ਵੀ ਦੂਰ ਪੜਾਏ ਹੋਏ ਨੇ ਤੂੰ ਵਰਤੈ ਜਹਰਾ ਜਹਰਾ ਉਹਦੇ ਵਰਤੈ ਰਹੇ ਤੂੰ ਘਟ ਘਟ ਭੋਗੈ ਆਪ ਤੁਦ ਲੇਪ ਨਾ ਲਾਹਰਾ ਤੂੰ ਪੁਰਖ ਆਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਜਦ ਘਟ ਭੋਗ ਆਪ ਤੂੰ ਸਾਰੇ ਹਿਰਦਿਆਂ ਜਾਪ ਤੂੰ ਸਾਰੇ ਸਰੀਰਾਂ ਜਾਪ ਦਾ ਆਪੇ ਇਸਤੇਮਾਲ ਕਰਦੈਂ ਜੋਤ ਦੀਦੀ ਦੀ ਇਸਤੇਮਾਲ ਦਾ ਸਰੀਰ ਦਾ ਉਹ ਕਰਦੀ ਆ ਬੋਲਦਾ ਬੋਲਦੀ ਦਾ ਛੋਟੇ ਹੈ ਵਰਜੀ ਦਾ ਜੋਤੀਓ ਚਲਦੀ ਹੈ ਸਰੀਰ ਤੇ ਠੀਕ ਹੈ ਜੀ ਉਹਨਾਂ ਆਪ ਲਈ ਉਹ ਤੇ ਲੇਪ ਨਾਲ ਲਾਹਰਾ ਉਹ ਤੇ ਲੇਪ ਨਾਲ ਲਾਹਰਾ ਤੇ ਤੂੰ ਲੇਪ ਤਾਂ ਫੇਰ ਵੀ ਲੇਪ ਤੋਂ ਪਰੇ ਸਾਰੇ ਕਹਣ ਹਿਰਦੇ ਵਿਚਾਲਾ ਅਲਿਪਤ ਲੇਪ ਨਾਲ ਲਾਹਰਾ ਲਾਹਰਾ ਕੀ ਹੁੰਦਾ ਜੀ ਨਾ ਕੋਈ ਲਾਹਰਾ ਤੇਰੇ ਇਹਦੇ ਵਿੱਚ ਮਾਇਆ ਚ ਅੱਛਾ ਜੀ ਲਾ ਲੈਣ ਵਾਸਤੇ ਤੂੰ ਲਫਤਰੀ ਹੋਇਆ ਮਾਇਆ ਜੋ ਕੋਈ ਲਾ ਮਾਇਆ ਤੈਨੂੰ ਪਤਾ ਹੈ ਮਾਇਆ ਜੋ ਕੋਈ ਬੰਦ ਮੇਰੇ ਮਤਲਬ ਦੀ ਚੀਜ਼ ਨਹੀਂ ਹੈ ਠੀਕ ਹੈ ਐ ਪੋਗਣ ਤੋਂ ਕੀ ਭਾਅ ਬਣਦਾ ਜੀ ਤੂੰ ਸਭ ਘਟ ਭੋਗੈ ਆਪ ਸਾਰੇ ਕੜਾਂਜ ਖਾਣਾ ਪੀਣਾ ਦਾ ਤੂੰ ਹੀ ਹੈ ਪਰ ਸਰੀਰ ਦੇ ਕੰਮ ਦੀਆਂ ਨੇ ਉਹ ਚੀਜ਼ਾਂ ਸਰੀਰ ਦੇ ਭੋਗ ਨੇ ਤੇਰਾ ਭੋਗ ਤਾਂ ਕੋਈ ਨਹੀਂ ਠੀਕ ਹੈ ਤੂੰ ਲੇਪ ਨਾ ਲਾਹਰਾ ਤੈਨੂੰ ਕੋਈ ਲਾਹਾ ਨਹੀਂ ਇਸ ਗੱਲ ਦਾ ਹਾਂਜੀ ਆਏ ਇਹਨੂੰ ਐਂ ਦੇਗਾ ਵੀ ਇਹ ਮੈਂ ਜਿਹੜਾ ਰੋਟੀ ਖਾ ਲਈ ਮੈਂ ਨਾਲ ਜਾਣੀ ਆਇਆ ਆਪਾਂ ਲੰਗਰ ਸ਼ਕਾਤਾ ਇਹਦੇ ਨਾਲ ਕੋਈ ਗਿਆਨ ਚ ਵਾਧਾ ਹੋ ਹਾਂਜੀ ਤੂੰ ਪੁਰਖ ਆਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਪੁਰਖ ਆਨੰਦੀ ਤੂੰ ਆਨੰਦੀ ਪੁਰਖ ਹੈਂ ਵਰਤ ਅਰੰਤ ਅਰੰਤ ਕੋਈ ਨਹੀਂ ਸਭ ਜੋਤ ਸਮਾਰਾ ਸਾਰੀ ਜੋਤਾਂ ਵਿੱਚ ਸਮਾਇਆ ਹੋਇਆ ਸਾਰੀਆਂ ਜੋਤਾਂ ਦੂਨੀ ਸਮਾਇਆ ਹੋਏ ਤੇ ਚਾਨਣ ਸਭ ਚਾਨਣ ਹੋਏ ਬ੍ਰਹਮ ਸਾਰਿਆਂ ਵਿੱਚ ਸਮਾਇਆ ਹੋਇਆ ਬ੍ਰਹਮ ਦਾ ਨੂੰ ਕੋਈ ਚੱਲੂਗਾ ਕਿਉਂਕਿ ਬ੍ਰਹਮ ਦੀ ਕੁਆਲਿਟੀ ਕੋਈ ਹੈ ਬ੍ਰਹਮ ਤੇ ਗੋੜੀ ਕੋਈ ਨਹੀਂ ਠੀਕ ਹੈ ਜੀ ਤੂੰ ਸਭ ਤੂੰ ਸਭ ਦੇਵਾ ਮਹ ਦੇਵ ਬਿਦਾਤ ਤੇ ਨਰਹਰਾ ਕੀ ਆਰਾਧੇ ਜੇਵਾ ਇਕ ਤੂੰ ਅਬਨਾਸੀ ਅਪਰੰਪਰਾ ਤੂੰ ਸਭ ਦੇਵਾਂ ਦੇਵ ਜਿੱਤੇ ਦੇਵ ਤੇ ਸਾਰਿਆਂ ਦੇ ਵਿੱਚ ਦੇਵ ਤੂੰ ਹੈ ਕਿੱਡਾ ਹੀ ਕੋਈ ਦੇਵੀ ਦੇਵ ਤੇ ਬਣਾ ਲਈ ਸਾਰਿਆਂ ਦੇ ਵਿੱਚ ਤੂੰ ਹੈ ਬਿਦਾਤ ਤੇ ਨਰਹਰਾ ਹੈ ਬਿਦਾਤ ਨੂੰ ਹਲਾ ਕਰਨ ਵਾਲਿਆ ਉਨਾਰੇ ਦੇ ਬਾਂ ਦੇ ਵਿੱਚ ਵਿਆਪਕ। ਕੀ ਆਰਾਧੋਂ? ਕੀ ਆਰਾਧੇ ਜਿਹਵਾ ਇਕ ਦੀਵ ਤੇਰੀ ਕੀ ਆਰਾਧਨ ਕਰੇ। ਤੂੰ ਅਗਨਸ਼ੀ ਆਪਰੰਪਰ ਤੇਰਾ ਕੋਈ ਹੰਤ ਨਹੀਂ ਪਰੇ ਤੋਂ ਪਰੇ ਤੇਰੀ ਸੋਭਾ। ਕਿ ਤੇਰੀ ਸੋਭਾ ਦੀ ਦੱਸ ਸਕਦਾ। ਇਹ ਪਰਮੇਸ਼ਰ ਦੀ ਗੱਲ ਹੈ ਕਿ ਮੂਲ ਦੀ ਗੱਲ ਹੈ ਜੀ। ਉルトੀ ਗੱਲ ਹੈ ਅੱਛਾ ਮਨ ਕਹਿ ਰਿਹਾ ਗੱਲ ਹੈ ਜੀ ਬੇਟਾ ਉਹ ਬੁੱਧੀ ਕਹ ਰਹੀ ਹੈ ਪਿਤਾਤਾ ਗਲਬ ਕੀ ਜਾਣੇ ਪੁੱਤ ਠੀਕ ਹੈ ਅਗਲੀ ਲਾਈਨ ਚ ਸਾਫ ਹੋ ਜਾਂਦਾ ਜਿਸ ਮੇਲੇ ਸਤਗੁਰ ਆਪ ਤਿਸਕੇ ਸਭ ਕੁੱਲ ਤਰਾ ਸੇਵਕ ਸਭ ਕਰਦੇ ਸੇਵ ਦਰ ਨਾਨਕ ਜਨ ਤੇਰਾ ਇੱਕ ਜਿਵੇਂ ਲੇ ਸਤਗੁਰੂ ਆਪੇ ਸਤਗੁਰੂ ਜਿਸ ਨੂੰ ਆਪ ਆਪਣੇ ਨਾਲ ਮਿਲ ਲਵੇ ਜਿਸ ਕੋ ਸਭ ਕੁਲ ਤਿਸ ਕੀ ਕੋ ਸਭ ਕੁਲ ਤਰਾ ਉਹਦੀ ਸਾਰੀ ਕੁਲ ਉਤਰ ਜਾਂਦੀਆਂ ਤਰ ਜਾਂਦੀ ਫਿਰ ਤਿਸ ਹਾਂਜੀ ਤਿਸ ਸਭ ਕੁਲ ਤਰਾ ਹਉ ਦਾ ਸਾਰੇ ਕੁਲ ਤਰ ਜਾਂਦੇ ਨੇ ਸਾਰੇ ਕੋਲ ਹੁੰਦੇ ਨੇ ਇੱਕ ਪਿਤਾ ਇੱਕ ਅਖਿਆ ਬਾਰਕ ਸਾਰੀ ਨੂੰ ਉਹ ਤਾਰ ਠੀਕ ਹੈ ਜੀ ਸੇਵਕ ਸੇ ਨਹੀਂ ਚਾਹੀਦਾ ਕੇ ਗਲਤ ਹੈ ਮੈਂ ਇੱਕ ਆਦਮੀ ਤੇ ਜ਼ਿਆਦਾ ਕੋਈ ਹੁੰਦੇ ਇੱਕ ਆਦਮੀ ਦੀ ਕੋਲ ਇੱਕ ਹੁੰਦੀ ਹੈ ਅੰਦਰ ਭਗਤਾਂ ਦੀ ਤਾਂ ਇੱਕੋ ਕੋਲ ਹੈ ਨਾ ਬਿਲਕੁਲ ਉਸ ਦੇ ਪਰਥਾ ਆਈ ਹੋਈ ਗੱਲ ਐ ਤੇ ਕੇ ਦੀ ਜਾਈਦਾ আচ্ছা ਜੀ ਉਸ ਤੋਂ ਸਾਰੀਆਂ ਗੁਲਾਂ ਤਰ ਜਾਂਦੀਆਂ ਨੇ ਉਹ ਸਾਰੀਆਂ ਗੁਲਾਂ ਨੂੰ ਤਾਰਨ ਦੇ ਸੁਭਰਤ ਹੋ ਜਾਂਦਾ ਹੁੰਦਾ ਫੇਰ ਗੱਲ ਫੇਟ ਆਉਂਦੀ ਹੈ ਜੇ ਇੱਥੇ ਤੇਲ ਆ ਦੀਏ ਕੇ ਦੀ ਕੱਟ ਕੇ ਤੁਸੀਂ ਇਹ ਕਹਿਣ ਦਾ ਭਾਵ ਸਤ ਗੁਰੂ ਦੇ ਵਾਸਤੇ ਕਿਹਾ ਜਾ ਰਿਹਾ ਹੈ। ਹਾਂ। ਵੀ ਜੇ ਸਤ ਗੁਰੂ ਵਾਸਤੇ ਕੀ, ਜਾਦੂਰ ਵਾਸਤੇ ਕਿਹਾ ਜਾ ਰਿਹਾ। ਜਿਹਨੂੰ ਮੇਲਵੇਂ ਉਹ ਉਹਦੇ ਵਾਸਤੇ ਕਿਹਾ ਜਾ ਰਿਹਾ। আচ্ছা ਸਭ ਕੁਲ ਕੀ ਹੋਊਗਾ ਫਿਰ ਭਗਤਾਂ ਦੇ ਕੁੱਲ ਸਾਰੇ ਹੋ ਕੋਈ ਹੋਰ ਵੀ ਕੁੱਲ ਹੈ। ਨਾ ਵੀ ਮੱਤਾਂ ਨੇ ਸਭ ਆਡ-ਆਡ ਕੁੱਲ ਦੁਨੀਆ ਦੀ। ਅੱਛਾ ਜੀ ਸਾਰਿਆਂ ਮਤਾਂ ਨੂੰ ਇਹ ਉਪਦੇਸ਼ ਦਿੱਤਾ ਜਾ ਸਕਦਾ ਹੈ ਗੁਰਬਾਣੀ ਦਾ ਸਾਰਿਆਂ ਕੋਲ ਦੱਸ ਸਕਦੀ ਹੈ ਗੁਰਬਾਣੀ ਦਾ ਠੀਕ ਹੈ ਵੀ ਵੀ ਮਤਾਂ ਤੋਂ ਲੈ ਲੈਣ ਤਰ ਜਾਣਗੇ ਦੇ ਜਿਹੜੀ ਮਤ ਉਪਦੇਸ਼ ਲੈ ਤੋਰੀ ਕਰ ਜੂ ਮਤ ਵੀ ਸਿੱਖਿਆ ਲੈ ਲੂ ਤਰ ਠੀਕ ਹੈ ਜੀ ਸੇਵਕ ਸਭ ਕਰਦੇ ਸੇਵ ਦਰ ਨਾਨਕ ਜਨ ਤੇਰਾ सेव कर सब करते सेव दर तेरे जिने सेव करदे तेरे द्वार तेरे सारे सेवा करदे ने तेरी जो तू कहना हो करते ने नानक जान तेरा नानक भी ऐसा ही तेरा जान है ऐसी सेवा ही नुकसान कर ले है जैसी सेवा दिल तेरे ने तेरे सेव करदे करते ने ऐसी ही सेवक, सेवा सेवा नुकसान कर ले तेरे दरवाजे पे तेरे दरवाजे ਠੀਕ ਹੈ ਜੀ ਇੱਥੇ ਪੰਜਵੀਂ ਪੌੜੀ ਦੀ ਸਮਾਪਤੀ ਹੈ ਜੀ ਹਾਂ ਜੀ ਠੀਕ ਹੈ ਜੀ ਅੱਜ ਦਾ ਆਪਣਾ ਕੋਟਾ ਹੋ ਗਿਆ ਪੂਰਾ ਠੀਕ ਹੈ ਜੀ ਚੰਗਾ ਜੀ ਫਿਰ ਬਾਬਾ ਜੀ ਬਾਬਾ ਜੀ